ਫਾਨੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦਾ ਹੈ ਦੇਜਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਭੜੀਵਦਾ ਹੈ ਭੜੀਵਦਾ ਇਹ ਸ਼ੁਰੂ ਜੋ ਗੱਤ ਬੋਲੇ ਸੱਤਾ ਬਲਵੰਡ ਜਿਹੜੀ ਕੇ ਦੀ ਹੋਏ ਭਲਾਇਆ ਬੋਲੇ ਖਸਬਦਾ ਠੀਕ ਹੈ ਜੀ ਇਹ ਪਹਿਲਾ ਇਹ ਹੁੰਦਾ ਹੈ ਹੈਗਾ ਵਾਕ ਪਹਿਲਾ ਬੋਲ ਇਹ ਹੈ ਛਾ ਹੋ ਜਾਂਦਾ ਹੈ ਨਾਮ ਦਾ ਆਰੰਭ ਕਰ ਜਾਂਦਾ ਜਿਹਨਾਂ ਨੂੰ ਉਹ ਖੀਵੇ ਹੋ ਜਾਂਦੇ ਨੇ ਖੀਵ ਦੇ ਖੀਵੇ ਕਹਿੰਦੇ ਨੇ আচ্ছা ਜੀ ਜੋ ਖੀਵ ਦੇ ਲਫ਼ਜ਼ ਜੋ ਖੰਢੀ ਹੈ ਲਫ਼ਜ਼ ਅਲੱਗ ਹੈ ਖੀਵ ਦੇ ਅਲੱਗ ਹੈ ਠੀਕ ਹੈ ਜੀ ਜਿਹੜੇ ਸੁਖਰੀ ਦੇ ਨਾਮ ਦਾ ਆਮਲ ਚੜ ਜਾਂਦਾ ਜਿਹਨਾਂ ਨੂੰ ਉਹਨੂੰ ਖੀਵੇ ਕਹਿੰਦੇ ਨੇ ਥੀਵਾ ਕਹਿੰਦੇ ਨੇ ਲਫ਼ਜ਼ ਇੱਕ ਠੀਕ ਹੈ ਜੀ ਨਛੇ ਜਿਹੜਾ ਆ ਇਹਦਾ ਬਸਰ ਕਰੋ ਕੀ ਹੋਇਆ ਜਿਨੇ ਭਗਤ ਹੁੰਦੇ ਨੇ ਆਪ ਦੀ ਬੋਲਦੇ ਹੁੰਦੇ ਕੋਈ ਚੀਜ਼ ਬੁਲਾਉਂਦੀ ਹੁੰਦੀ ਉਹਨਾਂ ਨੂੰ ਜੇ ਮੈਂ ਇਹ ਨਹੀਂ ਬੋਲਦਾ ਸ਼ਰਾਬ ਬੁਲਾਉਂਦੀ ਐ ਨਾ ਬੁਲਾਉਂਦਾ ਆਹ ਕਦੇ ਕਹਿੰਦਾ ਪੂਰੀ ਪਰੀ ਬੁਲਾਏ ਨਾ ना करता ਕਾਦਰ ਕਰੇ ਆ ਜਿਹੜਾ ਨਾਮ ਹੈ ਨਾ ਨਾਮ ਨੂੰ ਪਰਗੜਤਾ ਕਰਤਾ ਕਰਦਾ ਆਪ ਕਰਤਾ ਹੁੰਦਾ ਅੱਛਾ ਜੀ ਤਾਂ ਕਰ ਜਾਂਦੀ ਗੱਲ ਤਾਂ ਕਰਦਾ ਖਾਦਰ ਆਪ ਕਰਦਾ ਆਦਮੀ ਕਾਹ ਨੂੰ ਕਰ ਸਕਦਾ ਜਿਹਦੇ ਉਹਦੇ ਜਿਹੜੇ ਬੋਲਤੇ ਨਹੀਂ ਨੇ ਪਬਜੀਰ ਕੀਤਾ ਉਹ ਜੋਖੀਵ ਦੇ ਅਰਥੇ ਕਰਦੇ ਆਂ ਵੀ ਜੋਖੇ ਨਹੀਂ ਜਾ ਸਕਦੇ ਇਹ ਨਾਲ ਕਿ ਹੈ ਕਿ ਅਲੱਗ ਦੇ ਅਲੱਗ ਹੈ ਠੀਕ ਹੈ ਜੀ ਫਿਰ ਪਬਜੀਰ ਵੀ ਆਪਾਂ ਦਰਸ਼ਤ ਕਰ ਲਿਆ ਦੇ 2 7 ਭੈਣ ਪਰ ਆਵੇਂ ਪਾਰੰਗਦ ਦਾਨ ਪੜੀਉਦਾ ਇਹ ਮੈਨੂੰ ਦੱਸੋ ਵੀ ਬਿੰਦੀ ਲੱਗਣੀ ਐ ਇਹਦੇ ਤੇ ਆਹ ਪੜੀਬਨੇ 2 ਹਾਂਜੀ 2 ਪਰ ਕਹਿ ਲਈ ਜੀ ਗੁਣੇ ਕੋਣ ਬੈਲੇ ਲਈ ਆਪਾਂ ਨੂੰ ਠੀਕ ਹੈ ਜੀ ਇਸ ਪੀਲੇ ਲੱਭਦਾ 2 ਤਾਂ ਕਹ ਸ਼ਬਦ ਗੁਰੂ ਆ ਕਹ ਲਓ ਬਾਣੀ ਅੱਛਾ ਜੀ ਬਾਣੀ ਗੁਰੂ ਹੂੰ ਹੂੰ ਬਾਣੀ ਤੂੰ ਕਹ ਲਓ ਤਾਂ ਹੈ ਹੈਗੀ ਐ ਦੇਖੋ ਜੇ ਉਹ ਕਹ ਲਾਂਗੇ ਸ਼ਬਦ ਗੁਰੂ ਫਿਰ ਸੱਤ ਹੈ ਉਹਦਾਂ ਨੂੰ ਕੋ ਲੱਡਾ ਅੱਛਾ ਜੀ ਭੈਣ ਭਰਾ ਵਸ ਅੱਛਾ ਜੀ ਕਨਵਾ ਰਿਹਾ ਦੇ ਬੱਚੇ ਹੂੰ ਹੂੰ ਜਿਹੜੀ ਬਾਣੀ ਆ ਸ਼ਬਦ ਨੇ ਭੈਣ ਭਰਾਵਲੇ ਅੱਛਾ ਜੀ ਆ ਇੱਕ ਦੋ ਐਜੇ ਨੇ ਹਾਂਜੀ ਆਕਬ ਦਾ ਸ਼ਬਦ ਹੈ ਚਾਹੇ ਸ਼ਬਦ ਕਹੋ ਚਾਹੇ ਬਾਣੀ ਕਹੋ ਭੈਣ ਭਰਾਵ ਨਾ ਹੋ ਰਿਆ ਅੱਛਾ ਜੀ ਭੈਣ ਭਰਾਵ ਹੈ ਹੂੰ ਹੂੰ ਆ ਜਿਹੜਾ ਪਾਰ ਹੈ ਨਾ ਸੱਚ ਗੱਲ ਦੋ ਆਇਆ ਤੋਂ ਪਰੇ ਉਹ ਕਹੇ ਉੱਥੋਂ ਦਾਨ ਭੇਜਿਆ ਹੈ ਸਾਲੂ ਦਾਨ ਉੱਥੋਂ ਆਈ ਹੋਈ ਆ ਦਾਨ ਹੋ ਜੀ ਠੀਕ ਹੈ ਜੀ ਦਾ ਮਤਲਬ ਕੀ ਬਣਦਾ ਜੀ ਹੋਰੇ ਰਹਿਣੇ ਪੀੜ ਕੇ ਜਿਵੇਂ ਗੱਲੇ ਜੋ ਰਸ ਨਿਕਲਦਾ ਅੱਛਾ ਜੀ ਇਹ ਜਿਹੜੀ ਆਪਣੀ ਭਾਸ਼ਾ ਉਹਦੇ ਚ ਹੋਰ ਡੂਟਾ ਠੀਕ ਹੈ ਯਾਨੀ ਨਾਮ ਸ਼ਹਾਇਤ ਵਰਤੀ ਵਾਲੀ ਉਹ ਤਾਂ ਹੋਰ ਸੀ ਹੂੰ ਹੂੰ ਉਹ ਤਾਂ ਦੀਪਕ ਤੇ ਮੱਖਣ ਸਾਚੇ ਕੇ ਦੇ ਰਹੇ ਨੇ ਆਪਣੀ ਭਾਸ਼ਾ ਚ ਠੀਕ ਹੈ ਰੁੱਖੀ ਦੇ ਰਹੇ ਨੇ ਉਹ ਸਿੰਧਾ ਕੋਲ ਹੋ ਰਾਇਆ ਸੀ ਜਦੋਂ ਨੂੰ ਛੋੜਿਆ ਪਹਿਲਾਂ ਤਾਂ ਤੇ ਠੀਕ ਹੈ ਔਰ ਚੀਜ ਆ ਜੋ ਰਸ ਕੱਢ ਕੇ ਦੇ ਰਹਿਣ ਦੇ ਅੱਛਾ ਜੀ ਹਾਂ ਜੀ ਹਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਨਾਨਕ ਦਾ ਰਾਜ ਚਲਾਇਆ ਸੀ ਇਹ ਨਾਨਕ ਦਾ ਰਾਜ ਚਲਾਇਆ ਹੈ ਸੱਚ ਦਾ ਸ਼ਕਤੀਸ਼ਾਲੀ ਨੋ ਸੱਚ ਦੀ ਸੱਚ ਦੇ ਰਾਜ ਦੇ ਥੱਲੇ ਨੋ ਕਲੀ ਹੈ ਨੋ ਸ਼ਕਤੀ ਸੱਚ ਦੀ ਹੋਈ ਹੈ ਸੱਚ ਦਾ ਰਾਜ ਸੱਚ ਦੀ ਸ਼ਕਤੀ ਨਾਲ ਚੱਲਿਆ ਸੱਚ ਹੈ ਨੀ ਤੋਜਵੀ ਠੀਕ ਹੈ ਜਿੱਪੀ ਖਾਤੀ ਸੱਚ ਸਭ ਅਸਾਰ ਜੇ ਤਲਵਾਰ ਸੱਚ ਨਹੀਂ ਹੈ ਤਾਂ ਸਾਰਾ ਸਾਰੇ ਸੱਚੇ ਥੱਲੇ ਜੂਨ ਦੇ ਵਿੱਚ ਸੱਚ ਭਰਿਆ ਹੋਇਆ ਜਿਹੜਾ ਨਾਮ ਕਰੇ ਰਾਜ ਚਲਾਇਆ ਹਾਂਜੀ ਹੁਕਮਦਾਰ ਰਾਜ ਹੁਕਮ ਉਪਰ ਵੀ ਚੱਲਦਾ ਹੁਕਮਦਾਰ ਰਾਜ ਹੈ ਉਹਦੇ ਸੱਚਾ ਜੀ ਹੁੰਦੇ ਜੇ ਜੇ ਗੁਰਬਾਨੀ ਦਾ ਜਿਹੜਾ ਐਸਾ ਗਿਆਨ ਐਸਾ ਨਾਮ ਜਪੋ ਬੰਦੇ ਜੋ ਸਭ ਨੂੰ ਉੱਪਰ ਹੁਕਮ ਚਲਾਵੇ ਹਾਂ ਇਹ ਸਭ ਨੂੰ ਹੁਕਮ ਕਰ ਰੱਖੇ ਠੀਕ ਤੇ ਲਹਿਣੇ ਧਰਿਓਨ ਛੱਤ ਸਿਰ ਕਰਿ ਸ਼ਿਫਤੀ ਅੰਮ੍ਰਿਤ ਪੀਵੇ ਉਹ ਜਿਹੜਾ ਆਇਆ ਚਲਾਇਆ ਨਾਨਕ ਨੇ ਉਹਦਾ ਜਿਹੜਾ ਸੀ ਨਾ ਤਾਜ ਸ਼ਤਰ ਲਹਿਣੇ ਦੇ ਸਰ ਤੇ ਰੱਖ ਦਿੱਤਾ ਆ ਇਹ ਡਰ ਹੀ ਜ਼ਿੰਮੇਵਾਰੀ ਹੈ ਇਹ ਉਹ ਆ ਜਾ ਰਿਹਾ ਜਦੋਂ ਤਾਂ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਰਾਜ ਚਲਾਉਣ ਦੀ ਠੀਕ ਹੈ ਜੀ ਐਨ ਰਹਿਉਦੇ ਤਾਂ ਜਟੜਾ ਤੇ ਆਪਣੇ ਮੁੰਡਿਆਂ ਨੂੰ ਖੋਦੀ ਦਿੱਤਾ ਗਾਵੇਂ ਲਗਣਗੇ ਤਾਂ ਰਿਹਾ ਵੀ ਸਿਰ ਫਿਰ ਲੈਣਾ ਕੀ ਕਰਦਾ ਹੈ ਕਰਦਾ ਪਰ ਮੈਂ ਚਲਦੀ ਹਾਂ ਕਰ ਤੇ ਪੀਂਗ ਬੁਰਾ ਤਾਂ ਵੀ ਗੁਲੇ ਵੀ ਗੁਲੇ ਵੀ ਪੀਂਗ ਹੈ ਵੀਰਿਆਵਰ ਪਲਾ ਰਿਹਾ ਠੀਕ ਹੈ ਜੀ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਕੋਹਿ ਜੀਦਾ ਉਹ ਲੈਣਾ ਦੱਸਿਆ ਉਹਨੇ ਮਤ ਗੁਰ ਆਤਮ ਲੈਵਦੀ ਆਤਮ ਲੈਵ ਜਿਹੜਾ ਆਤਮਾ ਪ੍ਰਾਤਮਾ ਆਤਮਾ ਪ੍ਰਾਤਮਾ ਆਤਮ ਧਿਆਨ ਦੀ ਤਲਵਾ ਬੱਤ ਦਿੱਤੀ ਹੈ ਆਤਮਾ ਦਾ ਧਿਆਨ ਦਿੱਤਾ ਅੰਦਰ ਆਤਮਾ ਦੀ ਮਤ ਹੈ ਉਹ ਤੇ ਮਤ ਨਹੀਂ ਹੈ ਗੁਰੂ ਦੀ ਮੱਤ ਹੈ ਗੁਰਦੇਵ ਦੀ ਮੱਤ ਹੈ ਗੁਰ ਹੈ ਨਾ ਕੇ ਬਨ ਮੱਤ ਗੁਰ ਮੱਤ ਦਿੱਤੀ ਅੰਦਰੋਂ ਆਈ ਬਾਣੀ ਹੋ ਅੰਦਰ ਨੇ ਸਤਗੁਰ ਨੇ ਬਾਣੀ ਹੋ ਹੈ ਦੰਦ ਕਦੇ ਦੇ ਜਿਹੜਾ ਵੀ ਉਦਲੇ ਇਹ ਅੰਦਰੋਂ ਆਈ ਹੋਈ ਜਿਹੜੀ ਹੈ ਬਾਣੀ ਇਹ ਗੁਰ ਆਤਮ ਦੇਵ ਦੀ ਮੱਤ ਹੈ ਮਤਗੁਰ ਆਤਮ ਦੇਵ ਦੀ ਖੜਗ ਜੋਰ ਇਹ ਖੜਗਾਏ ਸ਼ਕਤੀ ਚਾਲੀ ਤਲਵਾਰ ਹੈ ਜੋਰ ਪੁਰਾ ਕੋਈ ਜੀ ਦੇ ਜੀ ਦੀ ਕਾਇਆ ਗਲਪ ਦਿੰਦੀ ਹੈ ਕਾਇਆ ਬਦਲ ਦਿੰਦੀ ਹੈ ਆ ਸ਼ਰੀਰ ਕੱਟ ਕੇ ਰੱਖ ਦਿੰਦੀ ਜਨਮ ਦੇ ਦਿੰਦੀ ਜਨਮ ਦੇ ਦਿੰਦੀ ਹੈ ਇਹਨੂੰ ਠੀਕ ਹੈ ਜੀ ਮਤ ਪਦਾ ਮਤ ਹੈ ਕਿਸ ਤਰ੍ਹਾਂ ਹੋਏਗਾ ਜੀ ਹਾਂ ਜੀ ਇਹਨਾਂ ਸਹੀ ਕਰੋਗੇ ਕਿਸ ਤਰ੍ਹਾਂ ਪੜਾਂਗੇ ਮਤਗੁਰ ਆਤਮ ਦੇਵ ਦੀ ਹਾਂਜੀ ਜ਼ੋਰ ਅਲੱਗਾ ਹੈ ਜ਼ੋਰ ਨਾਲ ਉਹਨਾਂ ਸ਼ਕਤੀ ਜਾਂ ਲਈ ਪਰ ਆ ਕੋਈ ਚੀਜ਼ ਹੈ ਅੱਛਾ ਜੀ ਪ੍ਰਕਿਰਤੀ ਵਾਂਗ ਜਿਹੜੀ ਸੁਭਾਅ ਬਦਲ ਦਿੰਦੀ ਹੈ ਜੀ ਦਾ ਹੈ ਅਜਾ ਕੋਈ ਜਿਹੜਾ ਅਖਰ ਹੈ ਮਤਲਬ ਹੈਗਾ ਸੁਭਾਅ ਹੈ ਜੀ ਪ੍ਰਕਿਰਤੀ ਵਾਂਗ ਸੁਭਾਅ ਬਦਲ ਲਿਆ ਅੱਛਾ ਜੀ ਬੰਦਾ ਸੁਭਾਅ ਬਦਲ ਕੇ ਬੁੱਧ ਬਦਲ ਗਈ ਠੀਕ ਹੈ ਜੀ ਹਾਂ ਗੁਰ ਰਿਤ ਪਾਈ ਠੀਕ ਹੈ ਜੀ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਠੀਵਦਾ ਜਦੋਂ ਯਾਦ ਕਰਤਾਰ ਮਨ ਕੋ ਹੋ ਕੇ ਅਰਦਾਸ ਕਰਦੇ ਨੇ ਰਹਿਰਾਸ ਕਰਦੇ ਨੇ ਆ ਰਹਿਰਾਸ ਹੈ ਗੁਰਬਾਣੀ ਤੇ ਗਾਇਨ ਕਰਦੇ ਨੇ ਇੱਕ ਬੰਦੇ ਕਿਛਤ ਹੋ ਕੇ ਗੁਰ ਗੋਰਾ ਗੁਰ ਕੇ ਲੈ ਰਹਾ ਰਾਸ ਕੀ ਗੁਰਾ ਕੇਲਾ ਅੰਦਲਾ ਗੋਰਾ ਹਰ ਬਾਹਲਾ ਗੁਰ ਕੇ ਲੈ ਇੱਕ ਹੋ ਗਏ ਹੈ ਰਾਖੀ ਨਾਨਕ ਸਲਾਮ ਤੋਂ ਦੀਵਦੇ ਉਹ ਕਹਿੰਦਾ ਸਲਾਮਤ ਹੋ ਜਾਂਦੇ ਜੀ ਉਹ ਨਾਨਕ ਬਾਰੇ ਵਰਤਿਆ ਨਾਨਕ ਤੇ ਸਿਹਾਰੀ ਹੈ ਆਹ ਹੈ ਹਾਂਜੀ ਨਾਨਕ ਵੀ ਇਹ ਕਹਿੰਦਾ ਤੁਸੀਂ ਇਹ ਦਵਾਈ ਲੈ ਲਈ ਤੁਸੀਂ ਠੀਕ ਹੈ ਅਕਾਗ ਅਕਾਗ ਅੰਗ ਤੋਂ ਲਾਣਕਾ ਹਾਂਜੀ ਉਹ ਕਹਿੰਦਾ ਫਿਰ ਵਰਦੇ ਜ ਆਪ ਵੀ ਕਹਿ ਰਿਹਾ ਸੱਤਾ ਬਲ ਬਲਦ ਨਾਨਕ ਨੂੰ ਵਿੱਚ ਗਵਾਹ ਬਣਾ ਕੇ ਗੱਲ ਕਰ ਰਿਹਾ ਹੈ ਹੈ ਨਾ ਠੀਕ ਹੈ ਜੀ ਕੋਣ ਲਾਨਕ ਦੇ ਅੰਤਾਰ ਉਹ ਫਿਰ ਨਹੀਂ ਵਰ ਸਕਦੇ ਸਲਾਮਤ ਰਹਿੰਦੇ ਨੇ ਸਦਾ ਸਲਾਮਤ ਸਦਾ ਸਲਾਮਤ ਇੱਕ ਬਾਰੇ ਕਿਤੇ ਹੋ ਜਾਂਦਾ ਉਹ ਦੇ ਨੂੰ ਨਰਕਾਰ ਉਸੇ ਨੂੰ ਕਿਹਾ ਆ ਉਹ ਹੀ ਨਰਕਾਰ ਤੂੰ ਸਦਾ ਸਲਾਮਤ ਨਰਕਾਰ ਜਿਹੜਾ ਅੱਖਰ ਗੁਰ ਅੱਖਰ ਹੈ ਗੁਰ ਚਿਤ ਵਾਸਤੇ ਆਇਆ ਜੀ ਆ ਜੀ ਤੇ ਉਹ ਜਿਹੜਾ ਰਹਿਣ ਵਾਲਾ ਗਿਆਨ ਨੂੰ ਉਹ ਕਰਾਇਆ ਠੀਕ ਹੈ ਜੀ ਤੇ ਨਾਨਕ ਨਾਲ ਸੱਤ ਕਹਿ ਰਹੇ ਆ ਨੇ ਰਹਿਰਾਸ਼ ਕੀ ਉਹ ਸਲਾਮਤ ਥੀਵ ਦੇ ਕੀ ਮਤਲਬ ਹੁੰਦਾ ਜੀ ਨਹੀਂ ਨੇ ਰਾਮ ਤਾਂ ਨੇ ਅੱਛਾ ਜੀ ਰਾਮ ਤਾਂ ਉਹ ਸਦਾ ਸਲਾਮਤ ਹੋਵੇ ਤੂੰ ਸਦਾ ਸਲਾਮਤ ਰਹੰਕਾਰ ਉਹ ਕਰਨ ਵਰਦਾ ਜਮਾ ਬਾਨਦੇ ਨਹੀਂ ਆਉਂਦੇ ਠੀਕ ਹੈ ਜੀ ਉਹ ਜਮਾ ਬਾਨਦੇ ਨਹੀਂ ਆਉਂਦੇ ਸੱਚਖੰਡ ਦੇ ਵਾਸੀ ਹੋ ਜਾਂਦੇ ਸਦਾ ਸਲਾਮਤ ਹੋ ਜਾਂਦੇ ਰਹੋ ਠੀਕ ਹੈ ਜੀ ਹੋ ਗਿਆ ਹੋ ਜਾਂਦੇ ਨੇ ਠੀਕ ਹੈ ਜੀ ਸਹਤ ਟਿਕਾ ਦੀ ਤੋਸ ਜੀਵਦਾ ਟਿਕਾ ਦੇ ਅੱਛਾ ਜੀ ਟਿਕਾ ਦਿਓ ਤੀਤੋਸ ਅੱਛਾ ਜੀ ਹਾਂ ਸਤ ਉਹਨਾਂ ਨੂੰ ਪਰਮੇਸ਼ਰ ਨੇ ਜਿਉਂਦੇ ਹੀ ਸਾਥਾ ਇਹ ਮੰਨਿਆ ਨਹੀਂ ਜਾਂਦਾ ਕਾਸ਼ੀ ਵਤ ਨਹੀਂ ਮੰਨਦੀ ਕਿ ਜਿਉਂਦੇ ਰੂਟਾ ਹੋ ਸਕਦਾ ਜਿਉਂਦੇ ਦਾ ਉਹ ਕਹਿੰਦੇ ਹੋ ਗਿਆ ਤਾਂ ਮੁਕਤੀ ਹੋਗੀ ਮੁਕਤੀ ਬਰੇ ਤੇ ਬਣ ਲਈ ਜਿਉਂਦੇ ਲਟਕਾ ਹੋਈ ਨਹੀਂ ਸਕਦਾ ਜੋ ਪੀਵਲੀ ਬੋਲਦੇ ਬੰਦ ਤੋਂ ਨਹੀਂ ਬੋਲਦੇ ਹੁਣ ਦੇ ਵਿਦਵਾਨ ਨਹੀਂ ਬੋਲਦੇ ਉਹ ਕਹਿੰਦੇ ਸਤਿ ਟਗਾ ਦੇ ਤੋਸ ਜੀਵ ਦੇ ਜਿਉਂਦੇ ਰੂਹੀ ਟਗਾ ਦਿੱਤਾ ਲੈਣ ਰੂਹ ਸ਼ਬਦ ਗੁਰੂ ਦੇ ਠੀਕ ਹੈ ਜੀ ਸਾਨੂੰ ਪਹਿਲਾਂ ਇਹ ਪਲੇਖਾ ਪੈਂਦਾ ਸੀ ਕਿ ਨਾਨਕ ਨੂੰ ਗੁਰ ਕਿ ਨਾਨਕ ਨੇ ਅੰਗਦ ਨੂੰ ਜਿਉਂਦੇ ਜੀ ਸਲਾਮਤ ਹੁੰਦੇ ਹੀ ਉਹਨਾਂ ਨੂੰ ਨਮਸਕਾਰ ਕੀਤੀ ਤੇ ਉਹਨਾਂ ਨੂੰ ਟਿੱਕਾ ਦਿੱਤਾ ਗੁਰਿਆਈ ਦਾ ਇਹ ਅਰਥ ਅਸੀਂ ਪਹਿਲਾਂ ਪੜੇ ਹੋਏ ਆਂ ਉਹ ਉਲਟੇ ਕਹਿੰਦਾ ਦੱਸਦੇ ਵੀ ਹੁਣ ਟਿੱਕਾ ਅੱਜ ਅੱਜ ਸ੍ਰੀ ਨਾਨਕਦੇਵ ਪੱਖੇ ਸਾਡੇ ਖਾਲਸੇ ਦੇ ਟਿਕਾਣ ਹੋ ਜਾਂਦਾ ਸੀ ਫਿਰ ਵੀ ਹਾਂਜੀ ਛੱਡਿਆ ਘਰ ਟਿਕਾਣ ਠੀਕ ਹੈ ਜੀ ਤੇ ਗਾਵੇ ਹੈ ਲਫਜ਼ ਹੈ ਅੱਛਾ ਕਿਹਾ ਦਿੱਤੋ ਸਹਿ ਸਰੀਰ ਨੂੰ ਲੱਗਦਾ ਫਿਰ ਇੱਥੇ ਰਹਿ ਜਾਣਾ ਸੀ ਹੂੰ ਹੂੰ ਤੇ ਕਾਮੀੰਦੰਦੇ ਦਿੱਤਾ ਦੀ ਹੈ ਮੱਤਗੋ ਦਾਸ ਨੂੰ ਵੇਵਦੀ ਦਿੱਤੀ ਠੀਕ ਹੈ ਜੀ ਰੂਨੇ ਟਿਕਾ ਦਿੱਤਾ ਫਿਰ ਠੀਕ ਹੈ ਆਪਰੇਟ ਕਰਤਾ ਸੀ ਠੀਕ ਹੈ ਜੀ ਉਹ ਹੁਣ ਕਹਿੰਦਾ ਨਾ ਇਹ ਜਿਹਨੇ ਉਹ ਜੀ ਦੇ ਪੜਨਾਂ ਦੀ ਤਲਵਾਰ ਦਿੱਤੀ ਕੋਈ ਜੀ ਦੇ ਜੀ ਦੇ ਪਾਈ ਜਾਂਦੀ ਹੈ ਜੀ ਦੀ ਕਾਇਆ ਰਸਤ ਹੈ ਤੇ ਨਾਲੇ ਰਹਦੀ ਹੈ ਤਾਂ ਕਿ ਆਸੀ ਉਹ ਇਨਾਂ ਨੇ ਆਪਣੇ ਜੀ ਦੀ ਤਲਵਾਰ ਦਿੱਤੀ ਹੈ ਜੀ ਦਾ ਜਿਹਨੇ ਉਹ ਸੀ ਪੜਨ ਦਿੱਤੇ ਠੀਕ ਹੈ ਬਖਤੇ ਮਗਿਆ ਸੀ ਦਿੱਤੀ ਵੀ ਜੀ ਦੇ ਬੋਲ ਵਾਲੀ ਤਲਵਾਰ ਆ ਬਾਹਾਂ ਲਈ ਤਾਂ ਬਾਅਦ ਚ ਪੜਾਈਆ ਛੇਵੇਂ ਪਾਸ਼ਾ ਨੇ ਪਾਈ ਹੈ ਤਾਨੂੰ ਅੱਛਾ ਜੀ ਫੇਰ ਕਰਦੇ ਇੱਕ ਤਲਵਾਰ ਦਾ ਖੋਲ ਰਹੀ ਹੈ ਗੁਰਨਾਨ ਦੇ ਕੋਲ ਵੀ ਸੀ ਲੈਣੇ ਕੋਲ ਵੀ ਸੀ ਗੁਰਨਾਨ ਕੋਲ ਕਿਤਵਾਹੀ ਦੱਸ ਪਾਸ਼ਾ ਦਾਦ ਨੂੰ ਗੁਰਨਾਨ ਕੋਲ ਲਈ ਤੇ ਹੈ ਪਖਤਰੋ ਸੀ ਠੀਕ ਹੈ ਜੀ ਬਲਾ ਉਸ ਹੈ ਜਿਵੇਂ ਲੈਣੇ ਨੂੰ ਦੱਸਦੇ ਬਾਪ ਠੀਕ ਹੈ ਦੇਖ ਇੱਕ ਕੋਈ ਇੱਕ ਦਲਬਾਰ ਬੰਦੇ ਪਾਸ਼ਾਕੋਲਬੀਆ ਛੇਵੇਂ ਕੋਲਬੀਆ ਦੁੱਤੀ ਪਾਈਆਂ ਲੋਹੇ ਦੀ ਤਾਂ ਦੋ ਹੋਈਆਂ ਨੇ ਅੱਛਾ ਫੋਟੋ ਬੋਲਣ ਵਾਲੇ ਨੇ ਧੋਏ ਬਤਨਦਲੇ ਨੂੰ ਯਮਨਾ ਤੇ ਫੋਟੋ ਤਾਂ ਧੋਏ ਧੋਈਆਂ ਕੋਈ ਤੁਹਾਨੂੰ ਜਾਣੀ ਠੀਕ ਉਹ ਕਹਿੰਦੇ ਬਾਬਾ ਬੁੱਢਾ ਜੀ ਨੇ ਪਾਈਆਂ ਸੀ ਜੀਦੇ ਦੇ ਕੋਲ ਵੀ ਤਲਵਾਰ ਸੀ ਉਹ ਦੂਆ ਜਿਹੜੇ ਉਹ ਵੀ ਤਾਂ ਜੀ ਆਲਾ ਹੈ ਇੱਕ ਹੋਰ ਦੇ ਦੇ ਠੀਕ ਉਹ ਫਿਰ ਉੱਥੋਂ ਭਲੇਖਾ ਲੱਗ ਗਿਆ ਤੇ ਉਹ ਫਿਰ ਦੋ ਤਲਵਾਰਾਂ ਤਾਂ ਤੇ ਉਹ ਟਾਡੀਆਂ ਨੇ ਵੀ ਕਾਫੀ ਉਸ ਪਰ ਸਾਰੇ ਵਾਰਾਂ ਹੋਈਆਂ ਨੇ ਜਦੋਂ ਤੁਸੀਂ ਫੋਟੋ ਬਣਾਉਗੇ ਨਾ ਜਿਹੜੀ ਹੈ ਅਦ੍ਰਿਸ਼ਟੀ ਕਰੋਗੇ ਫਿਰ ਤਾਂ ਦੂਰੀਓ ਬਣ ਹਾਂਜੀ ਚਲਦਿਆਂ ਜਿੱਥੇ ਆਏ ਇਹਦੇ ਅ ਤਰਖੰਦ ਖਾਤਾ ਚੰਡੀ ਦਿਖਾਤੀ ਜਿਵੇਂ ਜੇ ਤੁਸੀਂ ਦੇਖ ਲਓਗੇ ਮੇਰਾ ਖਰਚੀ ਕੇ ਸਮਝਾਉਂ ਖਾਤਰ ਵੀ ਛੇੜੀ ਸਮਝਣਗੇ ਲੋਕ ਉਹ ਪਹਿ ਗਿਆ ਤੁੰਗਾ ਉਲਟਾ ਉਹੀ ਮੰਨ ਗਏ ਕੋਈ ਜੰਮਤਾ ਛੋਟੇ ਦੇ ਬੈਠਾ ਹੁੰਦਾ ਐਹੀ ਜੀ ਉਹ ਸ਼ਕਲ ਹੁੰਦੀ ਹੈ ਉਹ ਵੀ ਭਾਨ ਕੇ ਛੱਤ ਪਾਏ ਤੇ ਹਾਂਜੀ